ਜੇ ਜਿਹੜੀ ਤੁਸੀਂ ਆਖਿਆ ਮਾਇਆ ਜਮਾ ਕਰਾਓ ਗੁਰੂ ਘਰ ਦੀ ਮਾਇਆ ਇਹ ਸਾਧ ਸੰਗਤ ਦੀ ਹੈ ਇਥੇ ਸੰਗਤ ਦੀ ਮਾਇਆ ਹੈ ਇਹਦੇ ਨਾਲ ਕਿਸੇ ਗਰੀਬ ਦਾ ਪੇਟ ਤੇ ਭਰਿਆ ਜਾ ਸਕਦਾ ਸ਼ਾਹੀ ਖਜ਼ਾਨੇ ਨਹੀਂ ਭਰੇ ਜਾ ਸਕਦੇ ਮੈਨੂੰ ਤੇਰੀਆਂ ਗੱਲਾਂ ਸਾਰੀਆਂ ਹੀ ਪ੍ਰਮਾਨ ਨਹੀਂ ਠੁਕਰਾ ਦਿੱਤਾ ਕਿਉਂਕਿ ਸਤਗੁਰੂ ਬੇਮਹਤਾਜ ਹੁੰਦਾ ਹੈ ਬੇਮਹਤਾਜ ਸਤਗੁਰੂ ਦੀ ਨਿਸ਼ਾਨੀ ਹੈ ਨਾ ਜਹਾਂਗੀਰ ਬਾਦਸ਼ਾਹੀ ਦੀ ਪ੍ਰਵਾਦੀ ਖੀਚੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਆਖਿਆ ਮੈਨੂੰ ਕੋਈ ਵੀ ਪ੍ਰਮਾਨ ਨਹੀਂ ਚੰਦੂ ਨੇ ਸੋਚਿਆ ਪਈ ਹੁਣ ਮੌਕਾ ਬਣਿਆ ਹੋਇਆ ਇਹਨੂੰ ਜਹਾਂਗੀਰ ਨੂੰ ਆਖਿਆ ਜੀ ਇਹ ਮੁਕਦਮਾ ਮੈਨੂੰ ਦੇ ਦਿਓ ਮੈਂ ਇਹਨਾਂ ਨੂੰ ਸਮਝਾ ਲਵਾਂਗਾ ਤੇ ਤੁਹਾਡਾ ਜਿਹੜਾ ਇਹ ਮੁੱਲ ਖਰੀਦਿਆ ਸਵਾ ਲੱਖ ਰੁਪਈਆ ਚੰਦੂ ਨੇ ਦਿੱਤਾ ਹੈ ਮੁਕਦਮਾ ਮੁੱਲ ਖਰੀਦਿਆ ਗੁਰੂ ਅਰਜਨ ਦੇਵ ਜੀ ਨੂੰ ਮਨਾਉਣ ਵਾਸਤੇ ਕਿ ਮੇਰੀ ਲੜਕੀ ਦਾ ਰਿਸ਼ਤਾ ਤੁਸਾਂ ਪ੍ਰਮਾਨ ਕਰਨ। ਇਸ ਪੱਖੋਂ ਜਹਾਂਗੀਰ ਲਾਹੌਰ ਵਾਪਸ ਆਇਆ ਤੇ ਚੰਦੂ ਨੇ ਗੱਲਬਾਤ ਆਰੰਭ ਕੀਤੀ ਇਹਨਾਂ ਆਖਿਆ ਮਹਾਰਾਜ ਅਜੇ ਵੀ ਮੈਂ ਤੁਹਾਡਾ ਸਤਿਕਾਰ ਕਰਦਾ ਤੁਸਾਂ ਮੇਰੀ ਲੜਕੀ ਦਾ ਰਿਸ਼ਤਾ ਅਪਰਵਾਨ ਕੀਤਾ ਇਸ ਵਾਸਤੇ ਅਜੇ ਵੀ ਪ੍ਰਵਾਨ ਕਰ ਲੋ ਨਹੀਂ ਤੇ ਮੇਰੇ ਕੋਲ ਬੜੇ ਤਰੀਕੇ ਨੇ ਮੈਂ ਪ੍ਰਵਾਨ ਕਰਵਾ ਲਾਂਗਾ ਸਤਿਗੁਰੂ ਆਖਿਆ ਚੰਦੂ ਇਹ ਜਿਹੜੀ ਸਾਧ ਸੰਗਤ ਵੱਲੋਂ ਦਲੀਲ ਆਈ ਹੈ ਜੋ ਬਚਨ ਹੋ ਗਿਆ ਨਾ ਉਹ ਬਚਨ ਫਿਰ ਨਹੀਂ ਸਕਦਾ ਉਹ ਬਚਨ اٹਲ ਹੀ ਰਹੇਗਾ ਤੂੰ ਜਿਹੜਾ ਆਪਣਾ ਕੰਮ ਕਰਨਾ ਹੈ ਮੈਨੂੰ ਪਤਾ ਤੂੰ ਜੋ ਕੁਝ ਆਪਣੀ ਵਾਹ ਲਾਉਣੀ ਹੈ ਤੂੰ ਜੋ ਕਰਨਾ ਕਰ ਸਕਨੇ ਤੇਰੀ ਲੜਕੀ ਦਾ ਰਿਸ਼ਤਾ ਪਰਮਾਨ ਨਹੀਂ ਹੋਣ ਹੋਏਗਾ ਬਚਨ ਨਹੀਂ ਟਾਲ ਸਕਦੇ ਅਸੀਂ ਇਹਨਾਂ ਆਖਿਆ ਠੀਕ ਹੈ ਚੰਦੂ ਨੇ ਅਗਲੇ ਦਿਨ ਤਸੀਹੇ ਦੇਣੇ ਸ਼ੁਰੂ ਕੀਤੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅਰਦਾਸ ਕੀਤੀ ਅਕਾਲ ਪੁਰਖ ਅੱਗੇ ਸੱਚੇ ਪਾਤਸ਼ਾਹ ਇਹ ਜਿਹੜੀ ਹੁਣ ਅੱਗ ਤੇ ਜਿਹੜੀ ਤਸੀਹੇ ਆ ਰਹੇ ਨੇ ਅੱਗੇ ਇਹ ਇਹਦੇ ਤੋਂ ਰੱਖਿਆ ਆਪਨੇ ਕਰਨੀ ਹੈ ਲੋਕ ਸਰਦੀ ਬਲਦੀ ਤੇ ਬੈਠੇ ਰਹੇ ਸੱਤੀ ਰੇਤ ਸੀਸ ਵਿੱਚ ਪੈ ਰਹੀ ਐ ਪਰ ਸਤਗੁਰਾਂ ਨੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੇਰਾ ਨਾਮ ਠੰਡਾ ਬਹੁਤ ਤੇਰੇ ਨਾਮ ਦੀ ਤੁਸੀਂ ਮੈਨੂੰ ਠੰਡਕ ਦਿਓ ਤੇ ਨਾਮ ਇੰਨਾ ਠੰਡਾ ਲਿਖਿਆ ਗੁਰੂ ਅਰਜਨ ਦੇਵ ਨੇ ਪਾਤਸ਼ਾਹ ਕਹਿੰਦੇ ਨੇ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਨਾਮ ਜਪਣ ਵਾਲਾ ਬਹੁਤ ਠੰਡਾ ਹੁੰਦਾ ਗੁਰਬਾਣੀ ਵਿੱਚ ਇੱਕ ਪਾਠ ਹੈ ਕਹਿੰਦੇ ਨੇ ਗੁਰ ਦਾਤਾ ਗੁਰ ਹਿਵੇ ਘਰ ਗੁਰ ਦੀਪਕ ਤੇ ਹੋ ਲੋਏ ਸਤਿਗੁਰੂ ਜਿਹੜਾ ਉਹ ਦਾਤਾ ਦਸਾਰੀ ਦੁਨੀਆ ਦਾ ਤੇ ਸਤਿਗੁਰੂ برف ਦਾ ਪਹਾੜ ਹੈ ਹੁਣ برف ਦੇ ਪਹਾੜ ਦੇ ਉੱਤੇ ਕਿਤੇ ਅੱਗ બાળ ਦਿੱਤੀ ਜਾਏ ਤੇ برف ਪਿਘਲ ਤੇ ਸਕਦੀ ਹੈ ਪਰ ਪਹਾੜੇ ਨਹੀਂ ਕਹਿੰਦਾ ਵੀ ਤੁਸੀਂ ਅੱਗ ਨਾ ਬਾਲੋ ਗੁਰੂ ਅਰਜਨ ਦੇਵ ਨੇ ਜਰਾ ਵੀ ਸਿਹਰੀ ਕੀਤੀ ਜੋ ਕਰ ਰਿਹਾ ਚੰਦੂ ਆਪਣੀ ਸੜਦੀ ਲੋ ਤੇ ਬਿਠਾਇਆ ਗਿਆ ਤਤੀ ਰੇਤ ਸਿਰ ਵਿੱਚ ਪੈ ਰਹੀ ਹੈ ਸੀਸ ਤੇ ਉੱਤੇ ਪੈ ਰਹੀ ਹੈ ਤੇ ਫਿਰ ਵੀ ਸੀ ਨਹੀਂ ਕਰਦੇ ਪਏ ਕਿਸੇ ਕਵੀ ਨੇ ਲਿਖਿਆ ਹੈ 제ਠੀ ਸਿਖਰ ਦਪਰੇ ਸੂਰਜ ਅਗਨੀ ਬਾਣ ਚਲਾਉਂਦਾ ਤੱਕਿਆ ਤਾਂਬੇ ਵਰਗੀ ਧਰਤੀ ਤੱਕੀ ਅੰਬਰ ਅੱਗ ਬਸਾਂਦਾ ਤੱਕਿਆ ਚਾਰੇ ਪਾਸੇ ਲੂ ਦਾ ਫਾਂਡਾ ਦੁਨੀਆ ਨੂੰ ਝੁਲਸਾਂਦਾ ਤੱਕਿਆ ਧਰਤੀ ਦਾ ਹਰ ਜੀਵ ਜੰਤੂ ਰੋਂਦਾ ਤੇ ਕੁਰਲਾਂਦਾ ਤੱਕਿਆ ਭਾਨੀ ਦੀ ਪਰ ਅੱਖ ਦਾ ਤਾਰਾ ਰੱਬੀ ਸ਼ੁਕਰ ਮਨਾਂਦਾ ਤੱਕਿਆ ਦੁਨੀਆ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕਾਂਦਾ ਥੱਕਿਆ ਮੁਸਕਾਨ ਤੋਂ ਭਾਵ ਹੀ ਜਰਾ ਵੀ ਸੀਰੇ ਕੀਤੀ ਕਿਉਂਕਿ ਬਰਦਾਸ਼ਤ ਸ਼ਕਤੀ ਬਹੁਤੀ ਜਿੱਥੇ ਬਰਦਾਸ਼ਤ ਸ਼ਕਤੀ ਬਹੁਤੀ ਹੋਵੇਗੀ ਉੱਥੇ ਦੁੱਖ ਘਟ ਜਾਂਦਾ ਹੋਨੇ ਦਰਦ ਮਹਿਸੂਸ ਨਹੀਂ ਕੀਤੀ ਸੀ ਨਹੀਂ ਕੀਤੀ ਇਸ ਵਾਸਤੇ ਕਹਿੰਦਾ ਅੱਗ ਦੇ ਭਾਂਬੜ ਅੰਦਰ ਬੈਠਾ ਚੰਦੂ ਚੰਦਰੇ ਦੀ ਰਗ ਰਗ ਦੇ ਅੰਦਰ ਭਰੀ ਕੁਕਰਮੀ ਤੱਕੀ ਐ ਪ੍ਰਸ਼ਾਂਤਮਈ ਦੇ ਅੱਗੇ ਸੀਸ ਨਿਵਾਂਦੀ ਗਰਮੀ ਤੱਕੀ ਜਿੰਨਾ ਉਧਰ ਜ਼ੁਲਮ ਤਸ਼ੱਦਦ ਹੱਦੋਂ ਵੱਧ ਬੇਸ਼ਰਮੀ ਤੱਕੀ ਉਹਨਾਂ ਇਧਰ ਸਬਰ ਸਿਦਕ ਤੇ ਪਿਆਰ ਮੁਹੱਬਤ ਨਰਮੀ ਤੱਕੀ ਰੱਬ ਦੇ ਉੱਤੇ ਰੱਬ ਦਾ ਬੰਦਾ ਕਹਿਰ ਤੇ ਕਹਿਰ ਕਮਾਂਦਾ ਤੱਕਿਆ ਦੁਨੀਆ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕੰਦਾ ਤੱਕਿਆ ਜ਼ੁਲਮ ਜ਼ੋਰਾਂ ਤੇ ਹੈ ਪਰ ਜ਼ੁਲਮ ਨੂੰ ਸਹਿਣ ਵਾਲਾ ਵੀ ਬਹੁਤ ਵੱਡਾ ਹੈ ਪਹਾੜ ਜਿੰਦਾ ਜਿਗਰਾ ਗੁਰੂ ਅਰਜਨ ਦੇਵ ਜੀ ਦਾ ਸਵਾਦੀ ਲਾ ਕੇ ਬੈਠੇ ਹੋਏ ਨੇ ਕਹਿੰਦੇ ਨੇ ਜਦੋਂ ਅੱਗ ਦੇ ਭਾਂਬੜ ਅੰਦਰ ਬੈਠਾ ਜਦੋਂ ਕਿਸੇ ਨੇ ਜਾ ਕੇ ਕਿਸੇ ਨੇ ਮੀਆਂ ਮੀਰ ਨੂੰ ਦੱਸ ਦਿੱਤਾ ਕਿ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਸਰਦੀ ਲੋਹ ਤੇ ਬੈਠੇ ਨੇ ਕਿਥੇ ਉਹਨੂੰ ਦੱਸਿਆ ਜਾ ਕੇ ਲਾਲ ਲੋਹ ਸੀ ਲਾਲ ਅੰਗਿਆਰ ਹੋਈ ਭੜਕ ਭੜਕ ਕਰਕੇ ਪੱਠੀ ਭੜਕਦੀ ਸੀ ਲਾ ਕੇ ਚੌਂਕੜਾ ਪਾਨੀ ਦਾ ਚੰਨ ਬੈਠਾ ਤੇ ਚਿਰੜ ਚਿਰੜ ਕਰਕੇ ਚਰਬੀ ਛਿੜਕਦੀ ਸੀ ਕੜਛੇ ਰੇਤ ਪੈਂਦੇ ਸੀ ਸੀਸ ਉੱਤੇ ਚਿਰੜ ਤਿਰੜ ਕਰਕੇ ਰੇਤ ਟੜਕਦੀ ਸੀ ਤੇ ਦੋਜਕ ਬਾਗ ਸੀ ਉਸ ਦਿਨ ਲਾਹੌਰ ਬਣਿਆ ਚੱਪੇ ਚੱਪੇ ਉੱਤੇ ਹੋਣੀ ਕੜਕਦੀ ਸੀ ਕਿਸੇ ਜਾ ਕੇ ਆਖਿਆ ਵੀਰ ਤਾਈ ਪਿਆਰੇ ਗੁਰੂ ਜੀ ਕਸ਼ਟ ਉਠਾ ਰਹੇ ਨੇ ਸਿਰ ਤੇ ਰੇਤ ਤੱਤੀ ਠੱਲੇ ਲੋਤ ਤੱਤੀ ਨਾਲ ਪ੍ਰੇਮ ਦੇ ਚੌਂਖੜਾ ਲਾ ਰਹੇ ਨੇ ਮੀਆਂ ਮੀਰ ਆਇਆ ਕਹਿੰਦੇ ਨੇ ਅੱਗ ਦੇ ਭਾਂਬੜੇ ਅੰਦਰ ਬੈਠਾ ਜਾਂ ਪੀਰਾਂ ਦੇ ਪੀਰ ਨੂੰ ਤੱਕਿਆ ਤੇ ਅੱਗ ਬਗੂਲਾ ਗੁੱਸੇ ਅੰਦਰ ਉਹਦਾ ਮੀਆਂ ਮੀਰ ਨੂੰ ਤੱਕਿਆ ਮੀਆਂ ਮੀਰ ਨੇ ਆਣ ਕੇ ਦੇਖਿਆ ਜਿਸ ਵੇਲੇ ਹਵੇਲੀ ਵਿੱਚ ਉਸ ਕਿਲੇ ਵਿੱਚ ਜਾ ਕੇ ਸਤਗੁਰਾਂ ਨੂੰ ਤਤੀ ਲੋਹ ਤੇ ਬੈਠਿਆਂ ਨੂੰ ਤੇ ਉੱਚੀਆਂ ਬਾਹਾਂ ਕਰਕੇ ਉੱਚੀ ਪੁਕਾਰ ਕੀਤੀ ਐ ਖੁਦਾਵੰਦ کریم हे ਮੇਰੇ ਖੁਦਾ ਅੱਲਾਹ ਤਾਲਾ ਐਸੇ ਦਰਵੇਸ਼ਾਂ ਦੇ ਉੱਤੇ ਇਹਨਾਂ ਜ਼ੁਲਮ ਨਹੀਂ ਚਾਹੀਦਾ ਜੋ ਕੁਝ ਹੋ ਰਿਹਾ ਇਹ ਨਹੀਂ ਚਾਹੀਦਾ ਇਸ ਤਰ੍ਹਾਂ ਇਨੇ ਉੱਚੀਆਂ ਬਾਵਾ ਕਰਕੇ ਪੁਕਾਰਾਂ ਕੀਤੀਆਂ ਮੀਆਂ ਮੀਰ ਨੇ ਕਹਿੰਦੇ ਨੇ ਅੱਗ ਬਗੂਲਾ ਗੁੱਸੇ ਅੰਦਰ ਉਦੋਂ ਮੀਆਂ ਮੀਰ ਨੂੰ ਤੱਕਿਆ ਗੁੱਸੇ ਦੇ ਨਾਲ ਥਰ-ਥਰ ਕੰਬਦਾ ਉਹਦੇ ਜਦੋਂ ਸਰੀਰ ਨੂੰ ਤੱਕਿਆ ਤੇ ਨੈਣਾ ਨਾਲ ਤਸੱਲੀ ਦੇਂਦਾ ਉਦੋਂ ਗਹਿਰ-ਗਭੀਰ ਨੂੰ ਤੱਕਿਆ ਮੀਆਂ ਮੀਰ ਨੂੰ ਰਾਜ ਅਲਾਹੀ ਰਮਜ ਨਾਲ ਸਮਝਾਂਦਾ ਤੱਕਿਆ ਦੁਨੀਆਂ ਵਾਲੇ ਰੋਂਦੇ ਤੱਕੇ ਪਰ ਉਹਨੂੰ ਮੁਸਕਾਂਦਾ ਤੱਕਿਆ ਮੀਆਂ ਮੀਰ ਨੇ ਆਖਿਆ ਮਹਾਰਾਜ ਐਡੀ ਉੱਚੀ ਪਦਵੀ ਤੁਹਾਡੀ ਹਰੀ ਮੰਦਰ ਵਿੱਚ ਬੈਠਣ ਵਾਲੇ ਅੱਜ ਤੱਤੀਆਂ ਲੋਹਾਂ ਤੇ ਬੈਠਾ ਮੈਥੋਂ ਇਹ برداشت ਨਹੀਂ ਹੋ ਸਕਦਾ ਖੁਦਾ ਨੂੰ ਕਹਿੰਦਾ ਇਹ ਖੁਦਾਵੰਦ ਇਹ ਤੂੰ ਕੀ ਕਰਦਾ ਪਿਆ ਤੇਰੇ ਰੰਗ ਨਿਆਰੇ ਨੇ ਦੁਨੀਆ ਵਿੱਚ ਕਹਿੰਦਾ ਪਲ ਵਿੱਚ ਤਖਤ ਤੇ ਛਿੰਨ ਵਿੱਚ ਤਖਤਾ ਲੱਖੋਂ ਕੱਖ ਬਣਾਵੇਂ ਤੂੰ ਤਖਤ ਜਿੰਨਾ ਦਾ ਅਰਸ਼ੀ ਉੱਡਦਾ ਉਹਨਾਂ ਤੋਂ ਭੱਟ ਛੁਕਾਵੇਂ ਤੂੰ ਮਖਮਲਾ ਤੇ ਬੈਠਣ ਵਾਲੇ ਲੋਹਾਂ ਉੱਤੇ ਬਿਠਾਵੇਂ ਤੂੰ ਤੇ ਇੰਨੇ ਕਹਿਰ ਕਰੇ ਦਿਨੇ ਰਾਤੀ ਤੇ ਅਜੇ ਵੀ ਰੱਬ ਕਹਾਵੇਂ ਤੂੰ ਗਿਲਾ ਕੀਤਾ ਖੁਦਾ ਦੇ ਉਤੇ ਸਤਿਗੁਰਾਂ ਅਗੇ ਬੇਨਤੀ ਕੀਤੀ ਮਹਾਰਾਜ ਇੰਨੀ ਉੱਚੀ ਪਦਵੀ ਤੇ ਹੁੰਦਿਆਂ ਹੋਇਆ ਤੁਸੀਂ ਇੰਨਾ ਬਰਦਾਸ਼ਤ ਮੈਨੂੰ ਜੇ ਤੁਸਾਂ ਕੁਛ ਨਹੀਂ ਕਰਨਾ ਤੇ ਮੈਨੂੰ ਹੁਕਮ ਕਰੋ ਮੈਂ ਇਸ ਜਲਵ ਰਾਜ ਦੀਆਂ ਜੜ੍ਹਾਂ ਉਹ ਕੇ ਰੱਖ ਦੇਵਾਂ ਮੀਆਂ ਮੀਰ ਨੇ ਆਖਿਆ ਕਹਿੰਦਾ ਕਵੀ ਕਹਿੰਦਾ ਤੜਪ ਤੜਪ ਕੇ ਪੀਰ ਜੀ ਕਹਿਣ ਲੱਗੇ ਨਜ਼ਰ ਕਰੋ ਤੇ ਰੰਗ ਵਿਖਾ ਦੇਵਾਂ ਚੰਦ ਸੂਰਜ ਨੂੰ ਪਕੜ ਕੇ ਖਾ ਜਾਵਾਂ ਦਿੱਲੀ ਅਤੇ ਲਾਹੌਰ ਟਕਰਾ ਦੇਵਾਂ ਪੀ ਕੇ ਸੱਤੇ ਸਮੁੰਦਰ ਦਰਿਆ ਨਾਲੇ ਅੱਗ ਅੱਗ ਦੇ ਘਰ ਨੂੰ ਲਾ ਦੇਵਾਂ ਫੂਕ ਮਾਰ ਕੇ ਦਿਆਂ ਉਡਾ ਪਰਬਤ ਤੇ ਧਰਤੀ ਅਤੇ ਆਕਾਸ਼ ਉਲਟਾ ਦੇਵਾਂ ਮੈਨੂੰ ਦੱਸੋ ਕੀ ਕਰਾਂ ਮੈਂ ਆਖੋ ਇਸ ਜ਼ੁਲਮ ਰਾਜ ਦਾ ਖਾਤਮਾ ਕਰ ਮੈਂ ਸਤਗੁਰ ਆਖਿਆ ਮੀਆਂ ਮੀਰ ਅੱਗੋਂ ਹੱਸ ਕੇ ਗੁਰੂ ਜੀ ਕਹਿਣ ਲੱਗੇ ਹੁਕਮ ਪਿਆਰੇ ਦਾ ਪੀਰ ਪਰਤਾਈ ਦਾ ਨਹੀਂ ਤੇ ਰਹੀਏ ਸਦਾ ਹੀ ਰਾਮ ਰਜਾ ਅੰਦਰ ਤੇ ਵਿੱਚ ਭਾਣੇ ਦੇ ਮੀਆਂ ਕਬਰਾਈ ਦਾ ਨਹੀਂ ਮੀਆਂ ਮੀਰ ਅੱਜ ਉਹ ਪੰਕਤੀ ਜਿਹੜੀ ਤੂੰ ਆਖੀ ਸੀ ਉਹਦਾ ਜਰਾ ਦੇਖ ਲੈ ਭੀ ਅਰਥ ਹੋ ਗਿਆ ਕਿ ਨਹੀਂ ਹੋ ਗਿਆ ਬਸ ਜਿਸ ਵੇਲੇ ਇਹ ਆਖਿਆ ਤੇ ਮੀਆਂ ਮੀਰ ਨੇ ਹੱਥ ਜੋੜ ਕੇ ਸਜਦੇ ਕਰਕੇ ਵਾਪਸ ਚਲੇ ਗਿਆ ਖੜ ਲਗਾ ਤੂੰ ਖੁਦਾ ਹੈ ਤੈਨੂੰ ਦੁੱਖ ਹੋ ਹੀ ਨਹੀਂ ਸਕਦਾ ਇਹ ਸਭ ਕੁਝ ਤੂੰ ਆਪ ਹੀ ਕਰ ਰਿਹਾ ਮੀਆਂ ਮੀਰ ਵਾਪਸ ਗਏ ਸ਼ਾਮ ਨੂੰ ਚੰਦੂ ਆਇਆ ਉਹਨਾਂ ਆਖਿਆ ਤਤੀ ਲੋਤ ਉਤਾਰਿਆ ਗਿਆ ਸਤਗੁਰਾਂ ਨੂੰ ਆਖਿਆ ਅਜੇ ਵੀ ਮੰਨ ਜਾਓ ਮੈਂ ਇਲਾਜ ਕਰਵਾ ਦਿਆਂਗਾ ਤੇ ਨਹੀਂ ਤੇ ਕੱਲ੍ਹ ਵਾਸਤੇ ਜੜੀ ਆ ਨਾ ਸਜਾ ਬਹੁਤ ਵੱਡੀ ਦਿਆਂਗਾ ਇਹ ਨਹੀਂ ਮੰਨਣਾ ਤਾਂ ਉਹ ਆਖਿਆ ਕੱਲ ਸਜਾ ਇਹ ਹੈ ਕਿ ਜੇ ਤੁਸੀਂ ਨਹੀਂ ਮੰਨੇ ਮੇਰਾ ਬਚਨ ਮੇਰੀ ਗੱਲ ਨਹੀਂ ਮੰਨਣੀ ਤੇ ਕੱਲ ਮੈਂ ਕੱਚੇ ਚਮਚ ਗਾਊ ਦੇ ਚਮੜੇ ਵਿੱਚ ਮੜਾ ਕੇ ਤੁਪੇ ਰੱਖ ਦਿਆਂਗਾ ਸਾਰਾ ਦਿਨ ਜਿਸ ਵੇਲੇ ਇਹ ਸਜਾ ਸੁਣਾਈ ਗਈ ਤੇ ਸਤਿਗੁਰੂ ਆਖਿਆ ਇਸ ਤੋਂ ਪਹਿਲਾਂ ਮੈਂ ਸਵੇਰੇ ਰਾਵੀ ਵਿੱਚ ਅਸ਼ਨਾਣ ਕਰਨਾ ਚਾਹੁੰਦਾ ਇਹ ਚੰਦੂ ਨੇ ਪ੍ਰਵਾਨ ਕਰ ਲਿਆ ਭਈ ਸ਼ਾਇਦ ਮੰਨ ਜਾਣ ਜੇ ਇਹ ਗੱਲ ਜੁ ਆਖੀ ਹੈ ਪ੍ਰਵਾਨ ਕਰ ਲਈ ਗਈ ਸਵੇਰੇ ਅਗਲੇ ਦਿਨ ਜੇਠ ਸੁਦੀ ਚੌਥ ਵਾਲੇ ਦਿਨ ਸਵੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਾਂ ਸਿੱਖਾਂ ਨੂੰ ਨਾਲ ਲਿਆ ਜਿਹੜੇ ਨਾਲ ਗਏ ਸਨ ਇਹਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਬੜੀ ਮੁਸ਼ਕਲ ਨਾਲ ਸਤਗੁਰੂ ਜੀ ਰਾਵੀ ਤੇ ਪਹੁੰਚੇ ਰਾਵੀ ਤੇ ਜਾ ਕੇ ਸਿੱਖਾਂ ਨੂੰ ਆਖਿਆ ਮੈਨੂੰ ਓਨੇਕ ਪਾਣੀ 'ਚ ਅਗਾਹ ਕਰਕੇ ਖੜੇ ਕਰ ਦਿਓ ਜਿੱਥੇ ਮੈਂ ਚੁੱਭੀ ਲਾ ਕੇ ਅਸ਼ਰਾਨ ਹੋ ਸਕੀ ਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ ਜਿਸ ਵੇਲੇ ਖੜਾ ਕਰ ਦਿੱਤਾ ਗੁਰੂ ਅਰਜਨ ਦੇਵ ਪਾਤਸ਼ਾਹ ਪਾਣੀ ਵਿੱਚ ਖਲੋਤੇ ਜਲ ਵਿਚ ਰਾਵੀ ਦੇ ਜਲ ਪ੍ਰਵਾਹ ਵਿੱਚ ਖਲੋਤੇ ਤੇ ਹੁਕਮ ਕੀਤਾ ਤੁਸੀਂ ਸਾਰੇ ਬਾਹਰ ਚਲੇ ਜਾਓ ਹੁਕਮ ਮੰਨ ਕੇ ਬਾਹਰ ਆ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਰਾਵੀ ਦੇ ਵਿੱਚ ਜਿਉ 22 ਮਾਰੀ ਤੇ ਦੁਬਾਰਾ ਦਰਸ਼ਨ ਨਹੀਂ ਹੋਇਆ ਜਲ ਦੇ ਪ੍ਰਵਾਹ ਵਿੱਚ ਪ੍ਰਵਾਹ ਬਣ ਕੇ ਜਲ ਦਾ ਰੂਪ ਹੋ ਗਏ ਤੇ ਜਿਉ ਜਲ ਮੈਂ ਜਲ ਆਏ ਖਟਾਨਾਂ ਤੇ ਤਿਉ ਜੋਤੀ ਸਗ ਜੋਤਸਭਾ ਦਾ ਦੁਬਾਰਾ ਦਰਸ਼ਨ ਨਹੀਂ ਹੋਇਆ ਪੰਜ ਸਿੱਖਾਂ ਨੇ ਉੱਥੇ ਘੰਟਾ ਦੋ ਘੰਟੇ ਉਡੀਕਿਆ ਜਿਸ ਵੇਲੇ ਨਹੀਂ ਪਤਾ ਲੱਗਾ ਆਪ ਜਾ ਕੇ ਪਾਣੀ ਵਿੱਚ ਦੇਖ ਭਾਲ ਕੀਤੀ ਦੂਰ ਦੂਰ ਤੱਕ ਜਿੱਥੋਂ ਤੱਕ ਦੇਖ ਸਕਦੇ ਸਨ ਬਸ ਇਸ ਤੋਂ ਬਾਅਦ ਜਿਸ ਵੇਲੇ ਨਹੀਂ ਦਰਸ਼ਨ ਹੋਇਆ ਦੁਬਾਰਾ ਤੇ ਫਿਰ ਵਾਪਸ ਸ਼ਾਮ ਤੱਕ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਆਣ ਕੇ ਦੱਸਿਆ ਭਈ ਆਹ ਗੱਲ ਹੋ ਗਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦ ਹੋ ਗਏ ਮੈਂ ਅਰਜ ਇਹ ਕੀਤੀ ਸੀ ਕਿ ਇੰਨੀ ਨਿਮਰਤਾ ਤੇ ਇੰਨੀ ਠੰਡਕ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਵਿੱਚ ਗੁਰਸਿੱਖੀ ਸਮਾਜ ਵਾਸਤੇ ਅਣਖ ਤੇ ਆਣ ਨੂੰ ਕਿਵੇਂ ਬਰਕਰਾਰ ਰੱਖੀਦਾ ਇਹ ਦੱਸ ਕੇ ਸੰਸਾਰ ਤੋਂ ਲੋਪ ਹੋ ਗਏ ਤੇ ਮੈਂ ਅਰਜ ਕੀਤੀ ਸੀ ਕਿ ਇਹ ਨਿਮਰਤਾ ਦੇ ਸਮੁੰਦਰ ਨੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਇਸ ਨਿਮਰਤਾ ਨੂੰ ਗ੍ਰਹਿਣ ਕੀਤਾ ਉਹਨਾਂ ਦੀਆਂ ਇਹ ਨਿਸ਼ਾਨੀਆਂ ਆਈਆਂ ਸਣ ਕਿ ਮਿੱਠਾ ਬੋਲਣ ਨਿਮ ਚੱਲਣ ਦਇਆ ਦਾਨ ਉਪਕਾਰ ਇਹ ਪੰਜ ਨਿਸ਼ਾਨੀਆਂ ਸਣ ਜਿਹੜੇ ਜੜੀਆਂ ਮੈਂ ਅਰਜ਼ ਕੀਤੀਆਂ ਨੇ ਸੋ ਮੈਂ ਅਰਜ਼ ਕੀਤਾ ਸੀ ਕਿ ਨਿਮਰਤਾ ਦੇ ਇੰਨੀ ਨਿਮਰਤਾ ਗੁਰਸਿੱਖ ਵਿੱਚ ਜਦੋਂ ਆ ਜਾਏ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਚੰਗੇ ਗੁਣ ਦੇਵੀ ਗੁਣ ਉਹਨਾਂ ਵਿੱਚ ਆ ਜਾਂਦੇ ਨੇ ਜਿਹੜੇ ਨੀਵੇਂ ਹੋ ਜਾਂਦੇ ਨੇ ਤੇ ਜਿਹੜੇ ਨੀਵੇਂ ਹੁੰਦੇ ਨੇ ਉਹਨਾਂ ਨੂੰ ਫਲ ਵੀ ਬਹੁਤਾ ਲੱਗਦਾ ਹੈ ਇਸ ਵਾਸਤੇ ਇੱਥੋਂ ਕਥਾ ਸ਼ੁਰੂ ਕੀਤੀ ਸੀ ਤਾਂ ਮੈਂ ਸੀ ਬਹੁਤ ਜ਼ਿਆਦਾ ਹੋ ਗਿਆ ਮੈਂ ਇਹਦਾ ਖਿਮਾ ਦਾ ਜਾਚਕ ਸਤਿ ਸ੍ਰੀ ਅਕਾਲ